ਪ੍ਰਵੇਸ਼ ਕਾ 19ਵੀਂ ਸਦੀ ਦੇ ਮੱਧ ਵਿੱਚ ਆਰੀਆ ਸਮਾਜ ਦੇ ਨਾਮ ਦੀ ਸੰਸਥਾ ਸਾਡੇ ਦੇਸ਼ ਵਿੱਚ ਸਥਾਪਿਤ ਹੋਈ ਇਸ ਦੇ ਬਾਨੀ Swami Dayanand ਨੇ ਵੈਦਿਕ ਧਰਮ ਨੂੰ ਸਰਵਸ਼੍ਰੇਸ਼ਟ ਦੱਸਣ ਲਈ ਸਾਰੇ ਧਰਮਾਂ ਦੇ ਅਸੂਲਾਂ ਦਾ ਖੰਡਨ ਕੀਤਾ ਇਹਨਾਂ ਦੇ ਲਿਖੇ ਸਤਿਆਰਥ ਪ੍ਰਕਾਸ਼ ਗ੍ਰੰਥ ਵਿੱਚ ਸਾਰੇ ਧਰਮ ਸੰਚਾਲਕਾਂ ਤੇ ਸਾਰੇ ਧਰਮ ਅਨੁਆਈਆਂ ਦੀ ਨਿੰਦਾ ਕੀਤੀ ਸ਼ਬਦਾਵਲੀ ਵੀ ਐਸੀ ਭੱਦੀ ਵਰਤੀ ਜਿਸ ਨੂੰ ਵਿਦਵਾਨਾਂ ਨੇ ਅਸਭਿਅਕ ਦੀ ਸੰਗਿਆ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸਿਧਾਂਤਾਂ ਗੁਰਬਾਣੀ ਅਤੇ ਜੀਵਨ ਸ਼ੈਲੀ ਨੂੰ ਅੱਜ ਸਾਰਾ ਸੰਸਾਰ ਨਤਮਸਤਕ ਹੁੰਦਾ ਹੈ ਲਈ ਬੜੇ ਕੁੱਝੇ ਸ਼ਬਦ ਵਰਤੇ ਗਏ ਸਤਿਆਰਥ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਅਨਪੜ੍ਹ تھے ਗਵਾਰੋਂ ਵਾਲੀ ਬੋਲੀ ਬੋਲਤੇ تھے ਸੰਸਕ੍ਰਿਤ ਦਾ ਗਿਆਨ ਨਹੀਂ ਥਾ ਇਸ ਲਈ ਸੰਸਕ੍ਰਿਤ ਕੇ ਲਫਜ਼ ਨਿਰਭੈ ਕੋ ਨਿਰਭਾਉ ਬਣਾ ਦਿਆ ਪ੍ਰਭ ਦਾ ਪ੍ਰਭਤਾ ਕੇ ਭੁਖੇ ਥੇ ਇਸ ਲਈ ਵੇਦੋਂ ਕਾ ਖੰਡਨ ਕਰਤੇ ਥੇ ਫਿਰ ਕਬੀ ਉਸਤਤ ਵੀ ਕਰਤੇ ਸੇ ਇਤਿਆਦੀ। ਸਵਾਮੀ ਦਯਾਨੰਦ ਦੀਆਂ ਇਹਨਾਂ ਟਿੱਪਣੀਆਂ ਨੇ ਬੜਾ ਬਵਾਲ ਖੜਾ ਕਰ ਦਿੱਤਾ। ਅਖੀਰ ਇੱਕ ਮੁਸਲਮਾਨ ਨੇ ਇਹਨਾਂ ਦੇ ਪ੍ਰਚਾਰਕ ਸ਼ਾਰਦਾ ਨੰਦ ਦਾ ਕਤਲ ਕਰ ਦਿੱਤਾ ਅਤੇ ਕਤਲ ਦੇ ਜੁਰਮ ਵਿੱਚ ਸਰਕਾਰ ਨੇ ਫਾਂਸੀ ਲਗਾ ਦਿੱਤੀ। ਆਰੀਆ ਸਮਾਜ ਨੇ ਸ਼ਾਰਦਾ ਨੰਦ ਨੂੰ ਸ਼ਹੀਦ ਬਣਾ ਦਿੱਤਾ ਅਤੇ ਮੁਸਲਮਾਨਾਂ ਦੇ ਕਾਤਲ ਨੂੰ ਗਾਜ਼ੀ ਦਾ ਕਿਤਾਬ ਦੇ ਦਿੱਤਾ। ਅਖੀਰ ਸਰਕਾਰ ਨੂੰ ਸਤਿਆਰਤ ਪ੍ਰਕਾਸ਼ ਜਬਤ ਕਰਨਾ ਪਿਆ। ਅਜਿਹੀ ਹੀ ਦਸ਼ਾ ਮਿਸ਼ਨਰੀ ਕਾਲਜਾਂ ਵੱਲੋਂ ਐਲਾਨੇ ਸਿੱਖੀ ਦੇ ਅਖੌਤੀ ਧਰੂ ਤਾਰੇ ਗੁਰਬਖਸ਼ ਸਿੰਘ ਕਾਲਾਫਗਾਨਾ ਅਤੇ ਸਪੋਕਸਮੈਨ ਦੇ ਐਡੀਟਰ ਜੋਗਿੰਦਰ ਸਿੰਘ ਦੀ ਹੈ ਵਿਪਰਨ ਕੀ ਰੀਤ ਤੋਂ ਦੇ ਲੇਬਲ ਨਾਲ ਸਾਰੀ ਸਿੱਖ ਰਹਿਤ ਮਰਿਆਦਾ ਦਾ ਭੋਗ ਪਾ ਦਿੱਤਾ ਖੰਡਾ ਪਾਹੁਲ ਨੂੰ ਨਕਾਰ ਕੇ ਸਿੱਖ ਦੀ ਪਰਿਭਾਸ਼ਾ ਬਦਲ ਦਿੱਤੀ ਅੰਮ੍ਰਿਤ ਵੇਲੇ ਦਾ ਜਾਗਣਾ ਅਤੇ ਨਿੱਤਨੇਮ ਨੂੰ ਨਕਾਰ ਦਿੱਤਾ ਨਿੱਤਨੇਮ ਵਿੱਚੋਂ ਦਸਮ ਗ੍ਰੰਥ ਸਾਹਿਬ ਵਿਚਲੀਆਂ ਬਾਣੀਆਂ ਨੂੰ ਖਾਰਜ ਕਰ ਦਿੱਤਾ ਸਾਰੇ ਸਿੱਖੀ ਸੰਸਕਾਰਾਂ ਲਾਵਾ ਆਦਿ ਤੇ ਹੜਤਾਲ ਫੇਰ ਦਿੱਤੀ। ਬਾਬਾ ਬੁੱਢਾ ਜੀ ਵਰਗੇ ਮਹਾਪੁਰਸ਼ ਦਾ ਨਰਾਦਰ ਕੀਤਾ ਅਤੇ 18ਵੀਂ ਸਦੀ ਦੇ ਮਹਾਨ ਸਿੱਖ ਨਵਾਬ ਕਪੂਰ ਸਿੰਘ ਦਾ ਮਖੌਲ ਉਡਾਇਆ। ਗੁਰਬਖਸ਼ ਸਿੰਘ ਕਾਲਾਫਗਾਨਾ ਆਪਣੀਆਂ ਲਿਖਤਾਂ ਵਿੱਚ 1978 ਦੇ ਨਿਰੰਕਾਰੀ ਕਾਂਡ ਵਿੱਚ ਨਿਰੰਕਾਰੀਆਂ ਦੇ ਹੱਕ ਵਿੱਚ ਬੋਲਦਾ ਹੈ ਅਤੇ ਬਲੂ ਸਟਾਰ ਆਪਰੇਸ਼ਨ ਵੇਲੇ ਸਰਕਾਰੀ ਪੱਖਪੂਰਦਾ ਹੈ। ਅਸੀਂ ਆਪਣੀ ਕਿਤਾਬ ਸਭ ਦੁਸ਼ਟ ਚੱਖ ਮਾਰਾ ਵਿੱਚ ਸਾਬਤ ਕਰ ਦਿੱਤਾ ਹੈ। ਕਿ ਵਿਪਰਨ ਕੀ ਰੀਤ ਤੋਂ ਸਜਦਾ ਮਾਰਗ ਨਾਮੀ ਪੁਸਤਕਾਂ ਦਾ ਅਸਲੀ ਲੇਖਕ ਕੋਈ ਹੋਰ ਹੈ ਕਾਲਾ ਅਫਗਾਨਾ ਦਾ ਦੀ ਸਰਕਾਰੀ ਨੌਕਰੀ ਕੈਨੇਡਾ ਜਾ ਕੇ ਗ੍ਰੰਥੀ ਬਣ ਕੇ ਗੁਰਦੁਆਰੇ ਅੰਦਰ ਹੀ ਇੱਕ ਸਿੱਖ ਬੀਬੀ ਨਾਲ ਅਨੈਤਿਕਤਾ ਦੇ ਵਿਵਹਾਰ ਬਦਲੇ ਕੈਨੇਡਾ ਦੀ ਕੋਰਟ ਵੱਲੋਂ ਲਗਾਏ ਜੁਰਮਾਨੇ ਦੀ ਨਕਲ ਵੀ ਕਿਤਾਬ ਵਿੱਚ ਦਿੱਤੀ ਹੈ ਜੇ ਫਿਰ ਵੀ ਕਾਲਾ ਅਫਗਾਨਾ ਦੇ ਸਮਰਥਕ ਇਸ ਨੂੰ ਸਿੱਖੀ ਦੀ ਆਕਾਸ਼ ਗੰਗਾ ਦਾ ਤਰੂ ਤਾਰਾ ਕਹਿਣ ਤਾਂ ਸਹੀ ਫੈਸਲਾ ਪਾਠਕਾਂ ਤੇ ਹੀ ਛੱਡਦੇ ਹਾਂ ਕਾਲ ਅਫਗਾਨਾ ਦੀ ਸਹੀ ਜਾਣਕਾਰੀ ਸਰਦਾਰ ਜਰਨੈਲ ਸਿੰਘ ਚਾਹਲ ਡੀਜੀਪੀ ਰਿਟਾਇਰਡ ਮੋਹਾਲੀ ਅਤੇ ਸਰਦਾਰ ਇਕਬਾਲ ਸਿੰਘ ਰਿਟਾਇਰਡ ਕਮਾਂਡੈਂਟ ਪੁਲਿਸ ਜਿਨ੍ਹਾਂ ਦੇ ਲੇਖ ਆਮ ਅਜੀਤ ਅਖਬਾਰ ਛਪਦੇ ਹਨ ਤੋਂ ਜਾ ਸਕਦੀ ਹੈ ਬਲੂ ਸਟਾਰ ਆਪਰੇਸ਼ਨ ਪਿੱਛੋਂ ਆਪਣੀ ਬਦਨਾਮੀ ਨੂੰ ਧੋਣ ਲਈ ਡਾਕਟਰ ਕੁਲਦੀਪ ਸਿੰਘ ਰਿਟਾਇਰਡ ਮੁਖੀ ਪੀਜੀਆਈ ਚੰਡੀਗੜ੍ਹ ਅਨੁਸਾਰ ਰਾਜੀਵ ਗਾਂਧੀ ਨੇ ਸਿੱਖਾਂ ਨੂੰ ਬਦਨਾਮ ਕਰਨ ਲਈ 200 ਕਰੋੜ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਨੂੰ ਦਿੱਤਾ ਇਸ ਵਿੱਚੋਂ ਦਮਦਵੀ ਟਕਸਾਲ ਅਤੇ ਅਖੰਡ ਕੀਰਤਨੀ ਜਥਾ ਭਾਈ ਰਣਧੀਰ ਸਿੰਘ ਦੀਆਂ ਦੋ ਪ੍ਰਮੁੱਖ ਸੰਸਥਾਵਾਂ ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਪਿੱਛੋਂ ਖਾੜਕੂ ਆਦ ਨਾਲ ਤਕਰੀਬਨ 2 ਦਹਾਕੇ ਸਰਕਾਰ ਨੂੰ ਵਕਤ ਪਾਈ ਰੱਖਿਆ ਨੂੰ ਬਦਨਾਮ ਕਰਨ ਆਮ ਸੰਗਤਾਂ ਦੀਆਂ ਨਜ਼ਰਾਂ ਵਿੱਚ ਗਰਾਉਣ ਅਤੇ ਸਰਕਾਰ ਲਈ ਜ਼ਰੂਰੀ ਬਣ ਗਿਆ ਇਸ ਕੰਮ ਨੂੰ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ ਅਤੇ ਸੁਖਵਿੰਦਰ ਸਿੰਘ ਸਭਰਾ ਨੇ ਪੂਰੀ ਤਨਦੇਹੀ ਨਾਲ ਨਿਭਾਇਆ ਹੈ। ਸੁਖਵਿੰਦਰ ਸਿੰਘ ਸਭਰਾ ਨੇ ਸੰਤਾਂ ਦੇ ਕੋਟਕ ਪਹਿਲੀ ਪੁਸਤਕ ਵਿੱਚ ਪ੍ਰਮੁਖਤਾ ਇਹਨਾਂ ਦੋਨਾਂ ਸੰਸਥਾਵਾਂ ਨੂੰ ਦਿੱਤੀ। ਫਿਰ ਚਲਾਕੀ ਨਾਲ ਸੱਚਾ ਹੋਣ ਲਈ ਬਾਕੀ ਸੰਤਾਂ ਬਾਰੇ ਲਿਖਣਾ ਪਿਆ। ਅਸੀਂ ਆਪਣੀ ਕਿਤਾਬ ਕਾਮ ਸਿੱਖਾਂ ਦੇ ਕੋਟਕ ਵਿੱਚ ਇਹਨਾਂ ਦੋਨਾਂ ਦੀ ਮਾਨਸਿਕਤਾ ਨੂੰ ਉਘਾੜ ਕੇ ਪ੍ਰਗਟ ਕਰ ਦਿੱਤਾ ਹੈ। ਇਹ ਧਰੋ ਅੰਦਰੋਂ ਕਮਿਊਨਿਸਟ ਵਿਚਾਰਧਾਰਾ ਦੇ ਨਾਸਤਕ ਬੰਦੇ ਹਨ। ਲੋਕਾਂ ਨੂੰ ਭਰਮਾਉਣ ਲਈ ਬਾਹਰਲਾ ਬਾਣਾ ਸਿੱਖਾਂ ਵਾਲਾ ਧਾਰਨ ਕੀਤਾ ਹੈ ਅਤੇ ਆਪਣੀ ਗੱਲ ਸਾਬਤ ਕਰਨ ਲਈ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਦੇ ਹਨ ਸੁਖਵਿੰਦਰ ਸਿੰਘ ਸਭਰਾ ਨਾਲ ਚਿੱਠੀਆਂ ਰਾਹੀਂ ਹੋਈ ਗੱਲਬਾਤ ਤੋਂ ਦੂਸਰੀ ਚਿੱਠੀ ਪਿੱਛੋਂ ਅਸੀਂ ਇਸ ਦੀ ਮਾਨਸਿਕਤਾ ਸਮਝ ਕੇ ਲਿਖ ਦਿੱਤਾ ਸੀ ਕਿ ਅਸੀਂ ਤੇਰੇ ਲਾਲ ਝੰਡੇ ਨੂੰ ਨਹੀਂ ਮੰਨਦੇ ਜਿਸ ਦੇ ਉੱਤਰ ਵਿੱਚ ਇਸ ਨੇ ਬੜਾ ਲਾਲ ਪੀੜਾ ਹੋ ਕੇ ਲਿਖਿਆ ਕਿ ਅਸੀਂ ਪੂਰਨ ਗੁਰਸਿੱਖ ਹਾਂ ਅਤੇ ਤੁਸੀਂ ਪੂਰਨ ਤੌਰ ਤੇ ਸਿੱਖ ਵਿਰੋਧੀ ਲਾਬੀ ਦੇ ਏਜੰਟ ਹੋ पर ਇਸ ਦੀ ਪੁਸਤਕ ਸੰਤਾਂ ਦੇ ਕੌਤਕ ਭਾਗ 6ਵਾਂ ਵਿੱਚ ਜਿਸ ਤਰ੍ਹਾਂ ਇਸ ਨੇ ਤਰਕਸ਼ੀਲਾਂ ਵਾਂਗ ਵਿਗਿਆਨ ਨੂੰ ਧਰਮ ਤੋਂ ਉੱਚਾ ਦਰਸਾਇਆ ਹੈ ਸੁਖਮਣੀ ਦਰਸ਼ਨ ਦੇ ਅਖੀਰ ਵਿੱਚ ਵਿਗਿਆਨੀਆਂ ਦੇ ਗੁਣ ਗਾਏ ਹਨ ਅਤੇ 6ਵੀਂ ਪੁਸਤਕ ਵਿੱਚ ਟ੍ਰੇਡ ਗੁਪਤਵਾਸ ਲਈ ਰੂਸ ਵਿੱਚ ਪਹੁੰਚੇ ਗਦਰੀ ਬਾਬਿਆਂ ਦੀ ਇਮਾਨਦਾਰੀ, ਦ੍ਰਿੜ ਨਿਸ਼ਚਾ ਅਤੇ ਕੁਰਬਾਨੀ ਦਾ ਜਜ਼ਬਾ ਦੇਖਦੇ ਹੋਏ ਸਟਾਲਿਨ ਨੇ ਜਦ ਸਿੱਖ ਧਰਮ ਦਾ ਅਧਿਐਨ ਕੀਤਾ ਤਾਂ ਕਿਸੇ ਦੇ ਸਵਾਲ ਪੁੱਛਣ ਤੇ ਕਿ ਰੂਸ ਤੋਂ ਇੰਗਲੈਂਡ ਵਿੱਚ ਕਮਿਊਨਿਸਟ ਲਈ ਕਿਹੜਾ ਰਸਤਾ ਹੈ ਤਾਂ ਸਟਾਲਿਨ ਦਾ ਜਵਾਬ ਸੀ ਵਾਇਆ ਇੰਡੀਆ ਪੰਜਾਬ ਅਤੇ ਇਹਨਾਂ ਗਦਰੀ ਬਾਬਿਆਂ ਰਾਹੀਂ ਹੀ ਕਮਿਊਨਿਜ਼ਮ ਪੰਜਾਬ ਵਿੱਚ ਆਇਆ ਜਿਸ ਦੇ ਮੋਢੀ ਬਾਬਾ ਸੋਹਣ ਸਿੰਘ ਪਕੜਣਾ ਅਤੇ ਸੋਹਣ ਸਿੰਘ ਜੋਸ਼ ਆਦਿ ਸਨ ਪਰ ਕਾਰਨ ਮਾਰਕਸ ਦੀ ਇਹ ਟਿੱਪਣੀ ਨਾਲ ਧਰਮ ਇੱਕ ਅਫੀਮ ਹੈ ਕਮਿਊਨਿਜ਼ਮ ਅਤੇ ਆਮ ਜਨਤਾ ਵਿੱਚ ਫੈਲ ਨਾ ਸਕਿਆ ਲੈਂਡ ਸੀਲਿੰਗ ਐਕਟ ਪਾਸ ਹੋਣ ਨਾਲ ਅਤੇ ਪੰਜਾਬ ਵਿੱਚ ਕੋਈ ਵੱਡੀ ਇੰਡਸਟਰੀ ਨਾ ਹੋਣ ਨਾਲ ਕੋਈ ਵੱਡੀ ਟ੍ਰੇਡ ਯੂਨੀਅਨ ਵਾਲੀ ਲਹਿਰ ਇਹ ਨਾ ਚਲਾ ਸਕੇ ਫਿਰ ਚੀਨ ਤੇ ਹਮਲੇ ਪਿੱਛੋਂ ਨੈਕਸਟ ਲਹਿਰ ਫੇਲ ਹੋਣ ਕਾਰਨ ਪੰਜਾਬ ਵਿੱਚ ਕਮਿਊਨਿਜ਼ਮ ਦਾ ਚੁੰਬਰ ਨਿਕਲ ਗਿਆ ਹੁਣ ਇਨਾਂ ਕੋਲ ਹੋਰ ਕੋਈ ਰਾਹ ਨਾ ਰਹਾ ਸਿਵਾਏ ਇਸ ਦੇ ਕਿ ਸਿੱਖੀ ਵਾਲਾ ਭੇਸ ਧਾਰ ਕੇ ਗੁਰਬਾਣੀ ਦੇ ਅਰਥਾਂ ਨੂੰ ਤਰੋੜ ਮਰੋੜ ਕੇ ਉੱਪਰੋਂ ਸਿੱਖੀ ਪ੍ਰਚਾਰ ਅਤੇ ਅੰਦਰੋਂ ਲੋਕਾਂ ਦੀ ਸ਼ਰਧਾ ਭਾਵਨਾ ਗੁਰੂ ਪਿਆਰ ਅਤੇ ਰੱਬੀ ਪਿਆਰ ਖਤਮ ਕਰਨ ਲਈ ਵਿਗਿਆਨ ਦਾ ਸਹਾਰਾ ਦੀ ਸ਼ੁਰੂਆਤ ਗੁਰਬਖਸ਼ ਸਿੰਘ ਪ੍ਰੀਤ ਲੜੀ ਨਾਲ ਹੋਈ। ਫਿਰ ਪ੍ਰੋਫੈਸਰ ਸਾਬ ਸਿੰਘ ਜੀ ਦਾ ਕੀਤਾ ਗੁਰਬਾਣੀ ਦਾ ਟਿਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਇਹਨਾਂ ਨੂੰ ਬਹੁਤ ਫਿੱਟ ਬੈਠਾ ਹੈ। ਜਿਨ੍ਹਾਂ ਗੱਲਾਂ ਨੂੰ ਪ੍ਰੋਫੈਸਰ ਸਾਬ ਸਿੰਘ ਜੀ ਦਰਪਣ ਵਿੱਚ ਡਰ ਡਰ ਕੇ ਕਹਿੰਦੇ ਸੀ ਉਹਨਾਂ ਗੱਲਾਂ ਨੂੰ ਹੁਣ ਇੰਦਰ ਸਿੰਘ ਘੱਗਾ ਤੇ ਸਭਰਾ ਵਰਗੇ ਪੂਰੇ ਤਾਨ ਨਾਲ ਪ੍ਰਚਾਰ ਰਹੇ ਹਨ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਪਰਮ ਮਨੁੱਖ ਦੀ ਕਿਤਾਬ ਲਿਖ ਕੇ ਪਹਿਲੀ ਵਾਰੀ ਗੁਰੂ ਸਾਹਿਬ ਨੂੰ ਮਨੁੱਖੀ ਧਰਾਤਲ ਤੇ ਪੇਸ਼ ਕੀਤਾ ਸੀ ਪ੍ਰੋਫੈਸਰ ਸਹਿਬ ਸਿੰਘ ਜੀ ਨੇ ਇਸ ਨੂੰ ਆਪਣੀ ਭਾਸ਼ਾ ਵਿੱਚ ਸਤਕਾਰ ਨਾਲ ਪੇਸ਼ ਕੀਤਾ ਅਤੇ ਸਭਰਾ ਘੱਗਾ ਜਾਂ ਮਿਸ਼ਨਰੀ ਕਾਲਜ ਵਾਲੇ ਐਲਾਨੀਆਂ ਪ੍ਰਚਾਰ ਕਰ ਰਹੇ ਹਨ ਕਿ ਕਿਸੇ ਮਨੁੱਖ ਦੇ ਪੰਜੇ ਨਾਲ ਐਡਾ ਵੱਡਾ ਪੱਥਰ ਕਿਵੇਂ ਰੁੱਕ ਸਕਦਾ ਹੈ ਇਸ ਲਈ ਇਹ ਝੂਠ ਹੈ ਰੀਠਾ ਮਿੱਠਾ ਕਿਵੇਂ ਹੋ ਸਕਦਾ ਹੈ ਇਹ ਅੰਧਵਿਸ਼ਵਾਸ ਹੈ ਬੀਬੀ ਰਜਨੀ ਦੀ ਕਹਾਣੀ ਮਨ ਘੜਤ ਹੈ ਇੰਦਰ ਸਿੰਘ ਘੱਗਾ ਸੰਤਾਂ ਦੇ ਕੌਤਕ ਭਾਗ ਪਹਿਲਾ ਦੇ ਪੰਨਾ 182 ਤੇ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਆਨੰਦਪੁਰ ਨੂੰ ਖਾਲੀ ਕਰਨ ਵੇਲੇ ਸਰਸਾ ਦਾ ਛੋਟਾ ਜਿਹਾ ਬਰਸਾਤੀ ਨਾਲਾ ਨਹੀਂ ਰੋਕ ਸਕੇ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਅਰਦਾਸ ਨਾਲ اٹਕ ਦਰਿਆ ਕਿਵੇਂ ਰੁਕ ਸਕਦਾ ਹੈ ਇੰਦਰ ਸਿੰਘ ਘੱਗਾ ਅਤੇ ਸਭਰਾ ਨੇ ਆਪਣੀਆਂ ਲਿਖਤਾਂ ਵਿੱਚ ਦੋਗਲੀ ਪਾਲਿਸੀ ਧਾਰਨ ਕੀਤੀ ਹੈ। ਇੱਕ ਪਾਸੇ ਕਹਿੰਦੇ ਹਨ ਕਿ ਪ੍ਰੋਫੈਸਰ ਸਹਿਬ ਸਿੰਘ ਦੀ ਵਿਆਕਰਣ ਨੇ ਹੀ ਪੰਥ ਨੂੰ ਸਹੀ ਰਾਹ ਦਿਖਾਇਆ ਹੈ ਪਰ ਗੁਰਬਾਣੀ ਦੇ ਅਰਥ ਕਰਨ ਵੇਲੇ ਵਿਆਕਰਣ ਦੀਆਂ ਧੱਜੀਆਂ ਉਡਾ ਰਹੇ ਹਨ। ਘੱਗੇ ਦੇ ਲਿਖੇ ਗਰੜ ਚੜੇ ਗੋਬਿੰਦ ਆਇਲਾ ਵਿੱਚ ਗੁਰਬਾਣੀ ਅਰਥਾਂ ਬਾਰੇ ਜਦ ਮੈਂ ਘੱਗਾ ਨੂੰ ਪੁੱਛਿਆ ਕਿ ਇਹ ਵਿਆਕਰਣ ਅਨੁਸਾਰ ਗਲਤ ਹਨ ਤਾਂ ਉਸ ਦਾ ਸੀ ਕਿ ਵਿਆਕਰਣ ਬਣੀ ਨੂੰ 50 ਸਾਲ ਹੋ ਗਏ। ਇਸ ਵਿੱਚ ਸੋਧ ਕਰਨੀ ਚਾਹੀਦੀ ਹੈ ਜਦ ਮੈਂ ਅੰਮ੍ਰਿਤ ਵੇਲੇ ਅੰਮ੍ਰਿਤ ਦੇ ਸੰਦਰਭ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਰਥ ਲਿਖ ਕੇ ਉਸ ਨੇ ਮੈਨੂੰ ਲਿਖਤੀ ਜਵਾਬ ਦਿੱਤਾ ਕਿ ਇੱਥੇ ਪ੍ਰੋਫੈਸਰ ਸਾਹਿਬ ਗਲਤੀ ਕਰ ਗਏ ਪਰ ਦੂਜੇ ਪਾਸੇ ਪ੍ਰੋਫੈਸਰ ਸਾਹਿਬ ਜੀ ਨੂੰ ਹੋਣ ਨਜ਼ੀਬ ਖੁਦਾਏ ਦੇ ਭੇਦਨਕਸ਼ਾ ਦੇਣ ਲਿਖਦਾ ਹੈ ਪ੍ਰੋਫੈਸਰ ਸਾਹਿਬ ਸਿੰਘ ਜਾਪ ਸਾਹਿਬ ਸਵਈਏ ਚੌਪਈ ਸ੍ਰੀ ਪ੍ਰਕਾਸ਼ਿਕ ਸਿੰਘ ਬ੍ਰਦਰਜ਼ ਅੰਮ੍ਰਿਤਸਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਿਰਤਾਂਤ ਵਿੱਚ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ ਗੁਰੂਕ੍ਰਿਤ ਮੰਨਦੇ ਹਨ ਪਰ ਇੰਦਰ ਸਿੰਘ ਸਪੋਕਸਮੈਨ ਵਿੱਚ ਲਿਖਤੀ ਰੂਪ ਵਿੱਚ ਅਤੇ ਜ਼ੁਬਾਨੀ ਵਾਰ-ਵਾਰ ਆਖਦਾ ਹੈ ਕਿ ਜਾਪ ਸਾਹਿਬ ਸ਼ਿਵ ਪ੍ਰਾਨ ਦਾ ਅੰਗ ਹੈ ਅਤੇ ਪ੍ਰੋਫੈਸਰ ਸਿੰਘ ਜੀ ਗੁਰੂਕ੍ਰਿਤ ਆਖਦੇ ਹਨ ਇਸੇ ਤਰ੍ਹਾਂ ਭਾਈ ਕਾਨ ਸਿੰਘ ਨੱਬਾ ਭਾਈ ਜੋਧ ਸਿੰਘ ਪ੍ਰਿੰਸੀਪਲ ਤੇਜਾਰ ਸਿੰਘ ਡਾਕਟਰ ਭਾਈ ਵੀਰ ਸਿੰਘ ਜੀ ਅਕਾਲੀ ਕੌਰ ਸਿੰਘ ਜੀ ਗਿਆਨੀ ਦਿੱਤ ਸਿੰਘ ਅਤੇ ਹੋਰ ਉਸ ਸਮੇਂ ਦੇ ਕਿਸੇ ਵਿਦਵਾਨ ਨੇ ਭੀ ਦਸਮ ਗ੍ਰੰਥ ਦਾ ਵਿਰੋਧ ਨਹੀਂ ਕੀਤਾ ਪਰ ਮਿਸ਼ਨਰੀ ਕਾਲਜ ਵਾਲਿਆਂ ਨੇ ਖਾਸ ਕਰਕੇ ਮਿਸ਼ਨਰੀ ਕਾਲਜ ਦਿੱਲੀ ਚੌਂਤਾ ਅਤੇ ਜਵਦੀ ਕਲਾਂ ਨੇ ਜਹਾਦ ਖੜਾ ਕਰਕੇ ਪੰਥ ਵਿੱਚ ਵੰਡੀਆਂ ਪਾ ਕੇ ਖਾਨਾ ਜੰਗੀ ਤੱਕ ਨੌਬਤ ਬਣਾ ਦਿੱਤੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਅਧੀਨ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਦੇਰਿਆਂ ਦੀਆਂ जमीन ਹਥਿਆਉਣ ਲਈ ਮਿਸ਼ਨਰੀ ਕਾਲਜ ਵਾਲਿਆਂ ਦੇ ਬ੍ਰਾਹਮਣਵਾਦ ਦੇ ਹਉਏ ਨੇ ਉਦਾਸੀ ਨਿਰਮਲੇ ਸੇਵਾਪੰਥੀ ਵਰਗੀਆਂ ਸੰਸਥਾਵਾਂ ਜਿਨ੍ਹਾਂ ਨੇ ਔਖੀ ਘੜੀ ਵੇਲੇ ਗੁਰਦੁਆਰਿਆਂ ਦੀ ਸੰਭਾਲ ਕੀਤੀ ਗੁਰਬਾਣੀ ਦੀਆਂ ਪੋਥੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰਕੇ ਪੰਥ ਦੀ ਸੇਵਾ ਕੀਤੀ ਨੂੰ ਪੰਥ ਤੋਂ ਤੋੜ ਦਿੱਤਾ ਇਹਨਾਂ ਦੇ ਕੂੜ ਪ੍ਰਚਾਰ ਕਰਕੇ ਬਹੁਤ ਸਾਰੇ ਅਤੇ ਜਿੱਥੇ ਡੇਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਪਾਠ ਹੁੰਦਾ ਸੀ ਉੱਥੇ Hindu ਧਾਰਮਿਕ ਗ੍ਰੰਥ ਵਿਰਾਜਮਾਨ ਹੋ ਗਏ ਮਿਸ਼ਨਰੀ ਕਾਲਜ ਇੱਕ ਪਾਸੇ ਨਿਰਮਲਿਆਂ ਨੂੰ ਨਿੰਦਣ ਨੂੰ ਤਤਪਰ ਰਹਿੰਦੇ ਹਨ ਪਰ ਜਦ ਇਤਿਹਾਸਕ ਹਵਾਲਾ ਜਾਂ ਪ੍ਰਮਾਣ ਦੇਣਾ ਹੋਵੇ ਤਾਂ ਨਿਰਮਲਿਆਂ ਦੇ ਲਿਖੇ ਸੂਰਜ ਪ੍ਰਕਾਸ਼, ਕ੍ਰਿਤ ਮਹਾਕਵੀ ਸੰਤੋਖ ਸਿੰਘ ਅਤੇ ਤਵਾਰੀਖ ਗੁਰੂ ਖਾਲਸਾ ਕ੍ਰਿਤ ਗਿਆਨੀ ਗਿਆਨ ਸਿੰਘ ਦੀ ਬਾਹ ਫੜਦੇ ਹਨ ਦੂਜੇ ਪਾਸੇ ਇਹਨਾਂ ਦੀ ਕਥਾ ਗੁਰਦੁਆਰਿਆਂ ਵਿੱਚ ਕਰਨ ਤੋਂ ਬੰਦ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਜੇ ਇਹ ਗ੍ਰੰਥ ਸਾੜ ਦਿੱਤੇ ਜਾਣ ਤਾਂ ਗੁਰੂ ਇਤਿਹਾਸ ਅਤੇ ਪੰਥਕ ਇਤਿਹਾਸ ਕਿੱਥੋਂ ਮਿਲੇਗਾ ਇਸ ਪਿੱਛੇ ਮਕਸਦ ਇਹ ਹੈ ਕਿ ਇਨ੍ਹਾਂ ਗ੍ਰੰਥਾਂ ਦੇ ਹੁੰਦਿਆਂ ਇਹ ਇਤਿਹਾਸ ਨੂੰ ਕਾਮਰੇਡੀ ਰੰਗ ਨਹੀਂ ਛਾੜ ਸਕਦੇ ਜੋ ਕਿ ਇਹ ਹੌਲੀ-ਹੌਲੀ ਕਰ ਰਹੇ ਹਨ ਮਿਸ਼ਨਰੀ ਕਾਲਜ ਵਾਲਿਆਂ ਦਾ ਚहेता ਇਤਿਹਾਸਕਾਰ ਸਵਰਗੀ ਮਹਿੰਦਰ ਸਿੰਘ ਜੋਸ਼ ਜੋਸ਼ ਦਾ ਕਿਸ ਨੂੰ ਨਹੀਂ ਪਤਾ ਕਿ ਉਹ ਧਰੋ ਅੰਦਰੋਂ ਕਾਮਰੇਡ ਸੀ ਇਹ ਸੂਰਜ ਚੜ੍ਹੇ ਵਾਂਗ ਪ੍ਰਗਟ ਹੈ ਕਿ ਵਿਗਿਆਨ ਦਾ ਵਿਸ਼ਾ ਪਦਾਰਥ ਹੈ ਅਤੇ ਸਿੱਖ ਧਰਮ ਦਾ ਵਿਸ਼ਾ ਨਿਰੰਕਾਰ ਹੈ ਵਿਗਿਆਨ ਦਾ ਮੰਤਵ ਹੈ ਪਦਾਰਥ ਦੀ ਖੋਜ ਅਤੇ ਸਿੱਖ ਧਰਮ ਆਪਣੇ ਆਪ ਦੀ ਖੋਜ ਹੈ ਸੁਨ ਹੋ ਰੇ ਤੂੰ ਕੌਣ ਕਹਾਂ ਤੇ ਆਇਓ ਇਤੀ ਨਾ ਜਾਨੋ ਕੇਤੀਕ ਮੁद्दत ਚਲਤੇ ਖਬਰ ਨਾ ਪਾਇਓ ਵਿਗਿਆਨ ਦਾ ਮਨੋਰਥ ਹੈ ਕਿਸੇ ਚੀਜ਼ ਦਾ ਅੰਤ ਪਾਉਣਾ ਪਰ ਪ੍ਰਭੂ ਹੈ ਬੇਅੰਤ ਅਪਰੰਪਰ ਅਤੇ ਪਾਰਾਵਾਰ ਤੋਂ ਰਹਿਤ ਅਗੰਮ ਅਗੋਚਰ ਜੋ ਗਿਆਨ ਇੰਦਰੀਆਂ ਤੋਂ ਪਰੇ ਹੈ ਇਸ ਲਈ ਵਿਗਿਆਨੀ ਇਸ ਵਿਸ਼ੇ ਤੇ ਫੇਲ ਹੈ بڑے بڑے ਚਿੰਤਕ ਅਤੇ ਫਿਲਾਸਫਰ ਫੇਲ ਹਨ ਇਸ ਲਈ ਗੁਰੂ ਸਾਹਿਬ ਨੇ ਸਿੱਖ ਨੂੰ ਉਪਦੇਸ਼ ਦਿੱਤਾ ਹੈ ਕਿ ਅੰਤ ਪਾਉਣ ਲਈ ਜੀਵਨ ਨਾ ਗਾਲ ਬਲਕਿ ਉਸ ਦੇ ਗੁਣ ਗਾ ਤੇ ਉਸ ਵਿੱਚ ਅਭੇਦ ਹੋ ਜਾ ਗੁਣ ਕਹਿ ਗੁਣੀ ਸਮਾਵਣਿਆ ਹੁਣ ਜਿਹੜੇ ਬੰਦੇ ਵਿਗਿਆਨ ਦਾ ਚਸ਼ਮਾ ਲਗਾ ਕੇ ਗੁਰਬਾਣੀ ਪਰਚੋਲ ਰਹੇ ਹਨ ਅਤੇ ਗੁਰੂ ਨਾਨਕ ਗੋਬਿੰਦ ਰੂਪ ਦੇ ਜੀਵਨ ਨੂੰ ਕੋਖ ਰਹੇ ਹਨ ਉਹ ਕੀ ਸਿੱਤੇ ਕੱਢਣਗੇ ਇਹ ਸਭ ਨੂੰ ਪਤਾ ਹੈ ਮਿਸ਼ਨਰੀ ਕਾਲਜ ਦੇ ਸੰਚਾਲਕ ਪ੍ਰਚਾਰਕ ਅਤੇ ਖੋਜੀ ਇੱਥੋਂ ਹੀ ਪਰਮਾਰਸ਼ ਦੇ ਖੋਜੀਆਂ ਤੋਂ ਅਲੱਗ ਲਾਈਨ ਤੇ ਹੋ ਗਏ ਤਰਕਸ਼ੀਲ ਟੋਲਾ ਤੇ ਕਾਮਰੇਡੀ ਟੋਲਾ ਕਿਉਂਕਿ ਵਿਗਿਆਨ ਦਾ ਉਪਾਸ਼ਕ ਹੈ ਇਸ ਲਈ ਮਿਸ਼ਨਰੀ ਕਾਲਜ ਵਾਲੇ ਇਹਨਾਂ ਨਾਲ ਕਿਉਂ ਖਿਚੜੀ ਹੋ ਗਏ ਅੱਜ ਪੰਥ ਦਾ ਸਭ ਤੋਂ ਵੱਡਾ ਦੁੱਖਾਂ ਥੀ ਇਹ ਹੈ ਕਿ ਅਨਪੜ੍ਹ ਤਬਕਾ ਗੁਰਬਾਣੀ ਦੇ ਗੋਹਜਰ ਹਸਾਂ ਤੋਂ ਕੋਰਾ ਹੈ ਪੜੇ ਲਿਖੇ ਵਿਗਿਆਨ ਦੇ ਢਹੇ ਚੜ ਗਏ ਅਤੇ ਰਾਲ ਮਿਲ ਝੁਗਾ ਉਜਾੜੀ ਵਾਲੀ ਕਹਾਵਤ ਪੂਰੀ ਹੋ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਨਵੇ ਸਿੱਖਿਆਰਥੀ ਤੋਂ ਲੈ ਕੇ ਪਰਮ ਪੱਦ ਦੇ ਰਹੀ ਹੈ। ਪਰ ਇਹ ਆਪਣੀ ਮਾਨਸਿਕ ਅਵਸਥਾ ਪਰ ਇਹ ਆਪਣੀ ਮਾਨਸਿਕਤਾ ਵਾਲੀਆਂ ਕਸਵਟੀਆਂ ਬਣਾ ਕੇ ਆਪਣੇ ਮਤਲਬ ਦੀ ਗੁਰਬਾਣੀ ਦੀਆਂ ਤੁਕਾਂ ਦੇ ਕੇ ਆਪ ਸਿੱਖ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ ਪਰ ਇਹ ਆਪਣੀ ਮਾਨਸਿਕਤਾ ਵਾਲੀਆਂ ਕਸਵਟੀਆਂ ਬਣਾ ਕੇ ਆਪਣੇ ਮਤਲਬ ਦੀਆਂ ਗੁਰਬਾਣੀ ਦੀਆਂ ਟੁਕਾਂ ਦੇ ਕੇ ਆਮ ਸਿੱਖ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ ਜਿਹੋ ਜਹੀਆਂ ਤਰਕਾਂ ਮਾਰ ਕੇ ਸਭਰਾ ਨੇ ਪੰਥ ਪ੍ਰਮਾਣਿਤ ਹਸਤੀਆਂ ਨੂੰ ਭੰਡਿਆ ਹੈ ਇਸ ਤਰੀਕੇ ਨਾਲ ਗੁਰੂ ਸਾਹਿਬ ਨੂੰ ਭੰਡਣ ਦਾ ਇਹਨਾਂ ਨੇ ਰਾਹ ਮੋਕਲਾ ਕਰ ਦਿੱਤਾ ਹੈ ਜਾਂ ਸ਼ਾਇਦ ਪੰਥ ਦੀ ਮਾਨਸਿਕਤਾ ਟੈਸਟ ਕਰ ਰਹੇ ਹਨ ਕਿ ਜੇ ਇਹ ਕੂੜ ਪ੍ਰਚਾਰ ਸਿੱਖਾਂ ਨੇ ਸਹਿਜੇ ਹজম ਕਰ ਲਿਆ ਤਾਂ ਅਗਲਾ ਨਿਸ਼ਾਨਾ ਗੁਰੂ ਸਾਹਿਬ ਤੇ ਹੋਵੇਗਾ ਜੋ ਕਿ ਸਪੋਕਸਮੈਨ ਦੇ ਐਡੀਟਰ ਜੁਗਿੰਦਰ ਸਿੰਘ ਨੇ ਸ਼ੁਰੂ ਕਰ ਦਿੱਤਾ ਹੈ। ਗੁਰੂ ਕੇ ਪਿਆਰਿਆਂ ਨੇ ਗੁਰਬਾਣੀ ਪਾਠ ਕਰਨ ਲਈ ਵੱਖੋ-ਵੱਖਰੇ ਮਾਨਸਿਕ ਪੜਾਅ ਦੱਸੇ ਹਨ। ਪਹਿਲਾ ਪੜਾਅ ਹੈ ਗੁਰੂ ਬਾਣੀ ਦਾ ਕੇਵਲ ਪਾਠ ਕਰੀ ਜਾਣਾ। ਸੇਵਾ ਅਰਦਾਸ ਕਰਨ ਨਾਲ ਜਦ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਸਮਝ ਕੇ ਪੜਿਓ ਕਿ ਗੁਰਬਾਣੀ ਕੀ ਕਹਿ ਰਹੀ ਹੈ। ਇਸ ਹਾਲਤ ਵਿੱਚ ਸਿੱਖ ਗੁਰਬਾਣੀ ਨੂੰ ਸਹਿਜੇ ਸਹਿਜੇ ਵਿਚਾਰ ਕੇ ਅਰਥਾਂ ਨਾਲ ਬਾਣੀ ਪੜਦਾ ਹੈ। ਇਸ ਤਰ੍ਹਾਂ ਕਰਨ ਨਾਲ ਫਿਰ ਸੁਰਤ ਹੋਰ ਉੱਚੀ ਉੱਠਦੀ ਹੈ। ਪ੍ਰਾਣੀ ਵਿਚਾਰ ਕਰਦਾ ਹੈ ਕਿ ਗੁਰਬਾਣੀ ਕੀ ਕਹਿ ਰਹੀ ਹੈ ਤੇ ਮੈਂ ਕੀ ਕਰ ਰਿਹਾ ਹਾਂ ਕਿ ਮੈਂ ਗੁਰਬਾਣੀ ਅਨਸਾਰ ਜੀਵਨ ਜੀ ਰਿਹਾ ਹਾਂ ਇਸ ਤਰ੍ਹਾਂ ਜਦ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਤਾਂ ਗੁਰਸ਼ਿਕ ਨੂੰ ਆਪਣੇ ਔਗਣ ਨਜ਼ਰ ਆਉਂਦੇ ਹਨ ਇਸ ਸਟੇਜ ਤੇ ਪਹੁੰਚ ਕੇ ਸਿੱਖ ਫਿਰ ਪੀੜਾ ਮਹਿਸੂਸ ਕਰਦਾ ਹੈ ਕਿ ਮੈਂ ਔਗਣਾਂ ਦਾ ਤਿਆਗ ਕਰਾਂ ਪਰ ਕਿਉਂਕਿ ਜਨਮਾਂ ਜਨਮਾਂ ਦੇ ਬਣੇ ਹੋਏ ਸੰਸਕਾਰ ਮਨ ਤੇ ਹਾਵੀ ਹੁੰਦੇ ਹਨ ਇਸ ਲਈ ਮਨ ਵਾਰ-ਵਾਰ ਗਲਤੀ ਕਰਦਾ ਹੈ ਇਸ ਦੇ ਉਪਾਅ ਲਈ ਸਿੱਖ ਵੈਰਾਗ ਵਿੱਚ ਆ ਕੇ ਅਰਦਾਸ ਬੇਨਤੀਆਂ ਤੇ ਤਰਲੇ ਕਰਦਾ ਹੈ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਇੱਕ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰਾਂ ਅਰ ਬਹੁਤ ਸੰਤਾਵ ਹੈ ਸਰਨ ਤੁਹਾਰੇ ਕਰ ਹਾਰਿਓ ਅਨਕ ਬਹੁ ਭਾਂਤੀ ਛੋਡੈ ਕਤ ਹੂ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਤੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਪਾਉ ਗੁਰ ਕਾਬਦ ਕਮਾਇਆ ਜੀਤ ਲਏ ਓਏ ਮਹਾ ਬਖਾਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਅਨੁਭਵੀ ਗੁਰਸਿੱਖਾਂ ਦਾ ਕਹਿਣਾ ਹੈ ਇਸ ਹਾਲਤ ਤੋਂ ਸਿੱਖੀ ਦਾ ਮਾਰਗ ਸ਼ੁਰੂ ਹੁੰਦਾ ਹੈ ਅਤੇ ਆਤਮਿਕ ਉਨਤੀ ਦਾ ਰਾਹ ਖੁੱਲਦਾ ਹੈ ਇਸ ਦ੍ਰਿਸ਼ਟੀਕੋਣ ਤੋਂ ਜੇ ਦੇਖੀਏ ਕਿ ਸੰਤਾਂ ਦੇ ਕੌਤਕ ਪੁਸਤਕ ਦੇ ਕਰਤਾ ਸੁਖਵਿੰਦਰ ਸਿੰਘ ਸਬਰਾ ਅਤੇ ਇੰਦਰ ਸਿੰਘ ਘੱਗਾ ਜਿਨ੍ਹਾਂ ਨੂੰ ਆਪਣਾ ਔਗਣ ਕੋਈ ਦਿਖਦਾ ਨਹੀਂ ਸਾਰਾ ਪੰਥ ਹੀ ਕੁਰਾਹੇ ਪਾਇਆ ਨਜ਼ਰ ਆਉਂਦਾ ਹੈ ਬਾਰੇ ਕੀ ਕਹਿ ਸਕਦੇ ਹਾਂ ਤਤ ਇਹੀ ਨਿਕਲੇਗਾ ਕਿ ਸਿੱਖੀ ਜੀਵ ਦੀ ਸ਼ੁਰੂਆਤ ਇਹਨਾਂ ਨਹੀਂ ਕੀਤੀ ਫਿਰ ਜਿਸ ਤਰ੍ਹਾਂ ਇਹ ਪੈਰ ਪੈਰ ਤੇ ਝੂਠ ਬੋਲਦੇ ਹਨ ਕਹਿਣਾ ਪਵੇਗਾ ਕਿ ਕਿਸੇ ਸਾਜ਼ਿਸ਼ ਅਧੀਨ ਕੰਮ ਕਰ ਰਹੇ ਹਨ ਪੰਥ ਪ੍ਰਮਾਣਿਤ ਹਸਤੀਆਂ ਦੀਆਂ ਚਲਾਈਆਂ ਸੰਸਥਾਵਾਂ ਦੇ ਹੁਣ ਦੇ ਪ੍ਰਬੰਧਕਾਂ ਦੀਆਂ ਊਣਤਾਈਆਂ ਜ਼ਾਹਰ ਕਰਕੇ ਜਿਸ ਤਰ੍ਹਾਂ ਇਹ ਇਨ੍ਹਾਂ ਮਹਾਪੁਰਸ਼ਾਂ ਨੂੰ ਭੰਡ ਰਹੇ ਹਨ ਜੇ ਇਹੋ ਕਸਵਟੀ ਅੱਜ ਦੇ ਸਿੱਖਾਂ ਤੇ ਲਾ ਕੇ ਕੋਈ ਕਹੇ ਕਿ ਇਨ੍ਹਾਂ ਦਾ ਗੁਰੂ ਵੀ ਅਜਾਈ ਹੋਵੇਗਾ ਸਾਡਾ ਮਨ ਕੀ ਕਹੇਗਾ ਕਲਗੀਧਰ ਮਹਾਰਾਜ ਨੇ ਮਸੰਦ ਪ੍ਰਣਾਲੀ ਖਤਮ ਕਰ ਦਿੱਤੀ ਸੀ ਕਿ ਸਾਰੇ ਮਸੰਦ ਤੇਲ ਵਿੱਚ ਤਲਣ ਵਾਲੇ ਸੀ ਨਹੀਂ ਉਦੋਂ ਭੀ ਭਾਈ ਫੇਰੂ ਵਰਗੇ ਮਸੰਦ ਵੀ ਸੀ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਛਾਤੀ ਨਾਲ ਲਾ ਕੇ ਵਧਾਇਆ ਇਸੇ ਤਰ੍ਹਾਂ ਹੁਣ ਵੀ ਕਈ ਸੰਤਾਂ ਦੇ ਅਸਥਾਨ ਗੁਰੂ ਕਿਰਪਾ ਸਦਕਾ ਗੁਰਸਿੱਖੀ ਰਾਹ ਤੇ ਚੱਲ ਕੇ ਗੁਰੂ ਦਾ ਝੰਡਾ ਬੁਲੰਦ ਕਰ ਰਹੇ ਹਨ ਪਰ ਜਦ ਕਾਲੀਆਂ ਐਨਕਾਂ ਲਾ ਕੇ ਦੇਖਾਂਗੇ ਤਾਂ ਸਾਰੇ ਕਾਲੇ ਹੀ ਨਜ਼ਰ ਆਉਣਗੇ ਇਸ ਲਈ ਐਨਕ ਬਦਲਣ ਦੀ ਲੋੜ ਹੈ ਫਿਰ ਕੇ ਇਹ ਕਹੇ ਕਿ ਇਹਨਾਂ ਦਾ ਗੁਰੂ ਵੀ ਅਜਿਹਾ ਹੀ ਸੀ ਉਸ ਮਤ ਨੂੰ ਕੀ ਕਹੀਏ ਅਜਿਹੀ ਹੀ ਮਾਨਸਿਕਤਾ ਦੇ ਮਾਲਕ ਘੱਗਾ ਤੇ ਸਬਰਾਂ ਹਨ ਜਾਣਵਣ ਬੰਦਿਆਂ ਦਾ ਕਹਿਣਾ ਹੈ ਕਿ ਬੰਦੇ ਦੀ ਪਹਿਚਾਣ ਉਸ ਰਫ਼ਤਾਰ ਗੁਫਤਾਰ ਅਤੇ ਦਸਤਾਰ ਭਾਵ ਪੋਸ਼ਾਕ ਬੋਲੀ ਬਾਣੀ ਬੋਲ ਬਾਣੀ ਅਤੇ ਚਾਲ ਤੋਂ ਹੁੰਦੀ ਹੈ ਜਿਹੋ ਜਿਹੇ ਮਾਹੌਲ ਵਿੱਚ ਕੋਈ ਪੈਦਾ ਹੁੰਦਾ ਹੈ ਪਾਲ ਕੇ ਵੱਡਾ ਹੁੰਦਾ ਹੈ ਅਤੇ ਵਿਚਰਦਾ ਹੈ ਵੈਸੇ ਹੀ ਉਸ ਦੀ ਦੀ ਸ਼ਬਦਾਵਲੀ ਹੁੰਦੀ ਹੈ ਜਿਹੋ ਜਿਹੇ ਖਾਨਦਾਨ ਵਿੱਚ ਸਭਰਾ ਪੈਦਾ ਹੋਇਆ ਅਤੇ ਵੱਡਾ ਹੋ ਕੇ ਜਿਹੋ ਜਿਹੇ ਪੁਲਿਸ ਦੀ ਟ੍ਰੇਨਿੰਗ ਵੇਲੇ ਜਹਾਨ ਖੇਲਾ ਦੇ ਟ੍ਰੇਨਿੰਗ ਸੈਂਟਰ ਵਿੱਚ ਸਿੱਖਿਆ ਹੈ ਅਤੇ ਉਹੀ ਸ਼ਬਦਾਵਲੀ ਉਸ ਲਿਖਤ ਵਿੱਚ ਵਰਤੀ ਹੈ ਅਜਿਹੀ ਭੱਦੀ ਸ਼ਬਦਾਵਲੀ ਆਪਣੀਆਂ ਲਿਖਤਾਂ ਵਿੱਚ ਵਰਤ ਕੇ ਸਿਰਫ ਉਸ ਨੇ ਆਪਣੇ ਖਾਨਦਾਨ ਅਤੇ ਮਹਿਕਮੇ ਦਾ ਸਿਰ ਨੀਵਾ ਕੀਤਾ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਆਪਣਣ ਤੋਂ ਵੱਡੀ ਉਮਰ ਦੇ ਬੰਦੇ ਨੂੰ ਜੇ ਸਭਰਾ ਅਕਲੋਂ ਖਾਲੀ ਜਾਂ ਬੁੱਢਾ ਤੋਤਾ ਕਹੇ ਅਤੇ ਛੋਟੇ ਨੂੰ ਛੋਕਰਾ ਸਾਧ ਕਹੇ ਫਿਰ ਅੱਗੋਂ ਇਹੀ ਉੱਤਰ ਮਿਲੇਗਾ ਕਿ ਸਭਰਾ ਨਾ ਖੋਤਾ ਹੈ ਨਾ ਘੋੜਾ ਬਲਕਿ ਵਿਗੜਿਆ ਖਚਰਾ ਹੈ ਦਿੱਲੀ ਵਿੱਚ ਮਿਰਜ਼ਾ ਗਾਲਬ ਦੀ ਹਵੇਲੀ ਸਾਹਮਣੇ ਹਲਵਾਈ ਦੀ ਦੁਕਾਨ ਤੇ ਭੀੜ ਇਕੱਠੀ ਦੇਖ ਕੇ ਗਾਲਬ ਸਾਹਿਬ ਨੇ ਨੌਕਰ ਭੇਜ ਕੇ ਇਸ ਬਾਰੇ ਪਤਾ ਕੀਤਾ ਦੋ ਬੰਦੇ ਬਹਿਸ ਕਰ ਰਹੇ ਕਹਿੰਦਾ ਹੈ ਕਿ ਖੁਦਾ ਹੈ ਤੇ ਦੂਸਰਾ ਕਹਿੰਦਾ ਹੈ ਕਿ ਨਹੀਂ ਹਲਵਾਈ ਨੇ ਕੰਮ ਰੁਕਦਾ ਦੇਖ ਕੇ ਦੋਨਾਂ ਨੂੰ ਮਿਰਜ਼ਾ ਗਾਲਬ ਕੋਲ ਫੈਸਲਾ ਕਰਾਉਣ ਲਈ ਭੇਜ ਦਿੱਤਾ ਦੋਨਾਂ ਨੇ ਮਸਲਾ ਪੇਸ਼ ਕੀਤਾ ਨਾਸਤ ਕਹਿਣ ਲੱਗਾ ਕਿ ਸਾਬਤ ਕਰੋ ਕਿ ਖੁਦਾ ਹੈ ਗਾਲਬ ਸਾਹਿਬ ਨੇ ਸ਼ੇਰ ਪੜਿਆ ਖੁਦੀ ਮੇ ਜੋ ਆ ਗਿਆ ਉਹ ਖੁਦਾ ਕਿਉ ਕਰ ਹੁਆ ਜ਼ਹਿਨ ਮੇ ਜੋ ਘਰ ਗਿਆ ਲਾ ਅੰਤਹਾ ਕਿਉ ਕਰ ਹੁਆ ਖੁਦੀ ਮੇ ਜੋ ਆ ਗਿਆ ਉਹ ਖੁਦਾ ਕਿਉ ਕਰ ਹੁਆ ਜ਼ਹਿਨ ਮੇ ਜੋ ਘਰ ਗਿਆ ਲਾ ਅੰਤਹਾ ਕਿਉ ਕਰ ਹੁਆ ਇਹੀ ਗੱਲ ਗੁਰੂ ਸਾਹਿਬ ਕਰ ਰਹੇ ਹਨ ਜੇਤੀ ਪ੍ਰਭ ਜਨਾਈ ਰਸਨਾ ਤੇਤ ਭਨੀ ਅਨਜਾਨਤ ਜੋ ਸੇਵੈ ਤੇਤੀ ਨਹ ਜਾਏ ਗਨੀ ਜੇ ਤੀ ਪ੍ਰਭੂ ਜਨਾਈ ਰਸਨਾ ਤੇਤ ਭਣੀ ਅਨਜਾਨਤ ਜੋ ਸੇਵਾ ਤੇਤੀ ਨਹ ਜਾਏ ਗਨੀ ਪਰ ਇਹ ਦੋਨੋਂ ਭਲੇ ਮਾਨਸਾਂ ਦਾ ਫੈਸਲਾ ਹੈ ਕਿ ਸਾਰੇ ਪੰਥ ਵਿੱਚੋਂ ਕੇਵਲ ਸਾਨੂੰ ਹੀ ਅਕਲ ਆਈ ਹੈ ਅਤੇ ਹਉਮੈ ਵਿੱਚ ਗਰਸੇ ਹੋਏ ਆਖਦੇ ਹਨ ਕਿ ਭਾਈ ਰਣਧੀਰ ਸਿੰਘ ਫਾਲਸ ਈਗੋ ਦਾ ਸ਼ਿਕਾਰ ਹੈ 인ਦਰ ਸਿੰਘ ਕੱਗਨੂ ਰੋਸ ਹੈ ਕਿ ਟਕਸਾਲ ਦੇ ਹੁੱਲੜ ਬਾਜਾਂ ਨੇ ਕੈਨੇਡਾ ਵਿੱਚ ਮੇਰੇ ਨਾਲ ਸਟੇਜ ਤੇ ਬਦਸਲੂਕੀ ਕੀਤੀ ਪਰ ਇਸ ਦਾ ਕਾਰਨ ਕੋਈ ਨਹੀਂ ਦੱਸਿਆ ਕੈਨੇਡਾ ਤੇ ਅਮਰੀਕਾ ਤੋਂ ਮਿਲੀਆਂ ਵੀਡੀਓ ਕੈਸਟਾਂ ਅਨੁਸਾਰ ਜਦ ਨੇ ਸਟੇਜ ਤੋਂ ਕਿਹਾ ਕਿ ਜਦ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਠਾਇਆ ਗਿਆ ਤਾਂ ਉਹ ਬੇਹੋਸ਼ ਹੋ ਗਏ ਇਸੇ ਤਰ੍ਹਾਂ ਜਦ ਹੁਣ ਲਿਖਤੀ ਰੂਪ ਵਿੱਚ ਕੁਫਰ ਤੋਲ ਰਿਹਾ ਹੈ ਕਿ ਜਾਤ ਸਾਹਿਬ ਸ਼ਿਵ ਪ੍ਰਾਣ ਦਾ ਅੰਗ ਹੈ ਅਤੇ ਪੰਥ ਪ੍ਰਵਾਨਿਤ ਅਰਦਾਸ ਦੀ ਪਹਿਲੀ ਤੁਕ ਪ੍ਰਥਮ ਪਗਉਤੇ ਸਿਮਰ ਕੈ ਦੇਵੀ ਦੀ ਉਪਮਾ ਹੈ ਫਿਰ ਮਾਲਕਾਂ ਤੋਂ ਪੈਸਾ ਕਮਾਉਣ ਲਈ ਇਹਨਾਂ ਨੂੰ ਤਾਂ ਸਹਿਣਾ ਹੀ ਪਵੇਗਾ ਅਜੇ ਤਾਂ ਸ਼੍ਰੀਮਾਨ ਜੀ ਮਾਰਟਿਨ ਕਿੰਗ ਲੂਥਰ ਦੀ ਪਦਵੀ ਲੈਣ ਦੀ ਦੌੜ ਵਿੱਚ ਹਨ ਫਿਰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੂੰ ਪਦਰੀ ਸੰਸਾਰ ਨੂੰ ਅਲਵਿਦਾ ਕਹਿ ਕੇ ਹੀ ਮਿਲੀ ਸੀ ਆਪਣੀ ਹੱਟ ਧਰਮੀ ਤੇ ਦ੍ਰਿੜ ਹੋ ਕੇ ਫਿਰ ਇਹ ਦੂਸਰਿਆਂ ਨੂੰ ਜੇ ਦੋਸ਼ੀ ਕਹਿਣ ਤਾਂ ਇਨਸਾਫ ਕਰਨਾ ਪਾਠਕਾਂ ਦਾ ਕੰਮ ਹੈ ਗੁਰਬਾਣੀ ਵਿੱਚ ਮੱਖੀ ਦੋ ਪ੍ਰਕਾਰ ਦੀ ਦੱਸੀ ਹੈ ਇੱਕ ਸ਼ਹਿਦ ਵਾਲੀ ਮੱਖੀ ਦੂਸਰੀ ਗੰਦ ਵਾਲੀ ਮੱਖੀ ਸ਼ਹਿਦ ਵਾਲੀ ਮੱਖੀ ਕੇਵਲ ਸੁਗੰਧੀ ਵਾਲੇ ਫੁੱਲਾਂ ਤੇ ਬੈਠਦੀ ਹੈ ਅਤੇ ਰਸ ਇਕੱਠਾ ਕਰਦੀ ਹੈ ਫਿਰ ਜੋ ਮਲ ਬਾਹਰ ਕੱਢਦੀ ਹੈ ਓਪੀ ਮਿੱਠਾ ਸ਼ਹਿਦ ਅਖਵਾਉਂਦਾ ਹੈ ਜੋ ਸਰੀਰਕ ਤਾਕਤ ਲਈ ਗੁਣਕਾਰੀ ਹੈ ਅਤੇ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ ਤੀਸਰੀ ਗੱਲ ਕਿ ਸ਼ਹਿਦ ਵਾਲੀ ਮੱਖੀ ਆਪਣੇ ਰਸ ਇਕੱਠਾ ਕਰਨ ਵਿੱਚ ਮਸਤ ਰਹਿੰਦੀ ਹੈ ਗੁਰਬਾਣੀ ਦਾ ਫਰਮਾਨ ਹੈ ਸਤ ਸੰਗਤ ਮਿਲ ਰਹੀ ਐ ਮਾਦੋ ਜੈਸੇ ਮਦਪ ਮੱਖੀਰਾ ਭਾਵ ਜਿਸ ਤਰ੍ਹਾਂ ਸ਼ਹਿਦ ਦੀਆਂ ਮੱਖੀਆਂ ਫੁੱਲਾਂ ਤੋਂ ਸ਼ਹਿਦ ਇਕੱਠਾ ਕਰਨ ਵੇਲੇ ਕੇਵਲ ਆਪਣੇ ਕੰਮ ਵਿੱਚ ਵਸਤ ਹੁੰਦੀਆਂ ਹਨ ਅਤੇ ਹੋਰ ਕਿਤੇ ਧਿਆਨ ਨਹੀਂ ਰੱਖਦੀਆਂ ਇਸੇ ਤਰ੍ਹਾਂ ਸਤ ਸੰਗਤ ਵਿੱਚ ਇਕਾਗਰਿਤ ਹੋ ਕੇ ਬੈਠਣਾ ਚਾਹੀਦਾ ਹੈ ਫਿਰ ਇਹ ਮੱਖੀ ਗਲ ਨਹੀਂ ਪੈਂਦੀ ਕੇਵਲ ਜਿਸ ਤੋਂ ਇਸ ਖਤਰਾ ਜਾਪੇ ਜਾਂ ਮਾਰਦੀ ਹੈ ਦੂਸਰੇ ਪਾਸੇ ਆਮ ਮੱਖੀ ਹੈ ਜੋ ਗੰਦ ਤੇ ਬੈਠਦੀ ਹੈ ਤੇ ਗੰਦ ਹੀ ਕਰਦੀ ਹੈ ਅਤੇ ਬਿਨਾਂ ਕਿਸੇ ਕਾਰਨ ਹਰ ਇੱਕ ਤੇ ਆ ਬੈਠਦੀ ਹੈ ਜਿਸ ਬਾਰੇ ਗੁਰਬਾਣੀ ਕਹਿ ਰਹੀ ਹੈ ਮੱਖੀ RAM ਕੀ ਤੂੰ ਮੱਖੀ ਜਹਾਂ ਦੁਰਗੰਧ ਤਹਾਂ ਤੂੰ ਬੈਸੈ ਮਹਾ ਵਿਖਿਆ ਮਦ ਚਾਖੀ ਤਥਾ ਮੱਖੀ ਚੰਦਨ ਪਰ ਹਰੈ ਜਹਾਂ ਬਿਗੰਧ ਤਹ ਜਾਏ ਸੰਤਾਂ ਦੇ ਕੌਤਕ ਦੇ ਕਰਤਾ ਸੁਖਵਿੰਦਰ ਸਿੰਘ ਸਭਰਾ ਦੀਆਂ ਸਾਰੀਆਂ ਪੁਸਤਕਾਂ ਪੜ੍ਹ ਕੇ ਤੱਥ ਇਹੀ ਨਿਕਲਦਾ ਹੈ ਕਿ ਇਸ ਦੀ ਮਾਨਸਿਕਤਾ ਦੁਰਗੰਧ ਦੀ ਮੱਖੀ ਵਾਲੀ ਹੈ ਇਸ ਲਈ ਇਹ ਹਰ ਇੱਕ ਹਰ ਵਿੱਚੋਂ ਔਗਣ ਲੱਭਦਾ ਹੈ ਅਤੇ ਜੇ ਕਿਸੇ ਵਿੱਚ ਕੋਈ ਔਗਣ ਨਾ ਹੋਵੇ ਤਾਂ ਮਨ ਘੜਤ ਔਗਣ ਬਣਾ ਕੇ ਲਿਖਦਾ ਹੈ ਇਹੀ ਹਾਲ ਇਸ ਦਾ ਦਸ਼ਮ ਗ੍ਰੰਥ ਬਾਰੇ ਹੈ ਪੰਥ ਦੇ ਪੁਰਾਤਨ ਅਤੇ ਹੁਣ ਦੇ ਨਵੀਨ ਅਨੇਕਾਂ ਵਿਦਵਾਨਾਂ ਨੇ ਇਸ ਗ੍ਰੰਥ ਵਿੱਚੋਂ ਹੀਰੇ ਮੋਤੀ ਕੱਢ ਪੰਥ ਨੂੰ ਪੇਸ਼ ਕੀਤੇ ਪਰ ਸਭਰਾ ਅਤੇ ਇਸ ਟੋਲੇ ਦੇ ਹੋਰ ਬੰਦਿਆਂ ਨੂੰ ਕੇਵਲ ਚਿਤ੍ਰਿਤ ਰੂਪਾਂ ਦੀਆਂ ਸਤਰਾਂ ਹੀ ਦਿਸਦੀਆਂ ਹਨ ਸਾਰੀਆਂ ਪੁਸਤਕਾਂ ਵਿੱਚ ਖੰਡਣਵਾਦ ਤੋਂ ਸਿਵਾ ਹੋਰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਕਿ ਖੰਡਣਵਾਦ ਕੋਈ ਧਰਮ ਹੈ ਇਹ ਹਾਲ ਕਾਲ ਅਫਗਾਨਾਂ ਦੀਆਂ ਪੁਸਤਕਾਂ ਦਾ ਹੈ ਸੁਖਵਿੰਦਰ ਸਿੰਘ ਸਭਰਾ ਦੀਆਂ ਪੁਸਤਕਾਂ ਤੋਂ ਪ੍ਰਗਟ ਹੋਏ ਝੂਠ ਫਰੇਬ ਕਪਟ ਨੂੰ ਦੇਖਦਿਆਂ ਅਸੀਂ ਇਸ ਨੂੰ ਕੁਫਰਗੜ ਦੀ ਸੰਗਿਆ ਦਿੱਤੀ ਹੈ ਪ੍ਰਵੇਸ਼ਕਾ ਵਿੱਚ ਆਏ ਸਾਰੇ ਨੁਕਤਿਆਂ ਦਾ ਖੁਲਾਸਾ ਅਤੇ ਸਹੀ ਜਵਾਬ ਅਸੀਂ ਆਪਣੀ ਪਹਿਲੀ ਪੁਸਤਕ ਕਾਮ ਰੇਡੀ ਸਿੱਖਾਂ ਦੇ ਕੌਤਕ ਵਿੱਚ ਕੀਤਾ ਹੈ ਬਾਕੀ ਕਦਰ ਹੁਣ ਇਸ ਪੁਸਤਕ ਕਾਮ ਰੇਡੀ ਸਿੱਖਾਂ ਦੇ ਕੌਤਕ ਭਾਗ ਦੂਜਾ ਵਿੱਚ ਪੂਰੀ ਕਰ ਰਹੇ ਹਾਂ ਇਸ ਪੁਸਤਕ ਦੀ ਪ੍ਰੂਫ ਰੀਡਿੰਗ ਲਈ ਦਾਸ ਮਾਸਟਰ ਹਰਪਾਲ ਸਿੰਘ ਅਤੇ ਭਾਈ ਪ੍ਰੀਤਨ ਸਿੰਘ ਜੀ ਦਾ ਅਤੀ ਧੰਨਵਾਦੀ ਹੈ। ਇਸ ਕਾਰਜ ਇਹ ਕਾਰਜ ਮੇਰੇ ਲਈ ਬਹੁਤ ਔਖਾ ਸੀ। ਜੇ ਕਦੇ ਕਾਕਾ ਜਸਜੀਤ ਸਿੰਘ ਘਰੋਗੀ ਜ਼ਿੰਮੇਵਾਰੀਆਂ ਤੋਂ ਮੈਨੂੰ ਫਾਰਗ ਕਰਕੇ ਇਸ ਕਿਤਾਬ ਲਈ ਸਮਾਂ ਦੇਣ ਲਈ ਮੇਰੀ ਮਦਦ ਨਾ ਕਰਦਾ ਜਿੰਨੀ ਕੋ ਬੁੱਧੀ ਗੁਰੂ ਮਹਾਰਾਜ ਨੇ ਬਖਸ਼ੀ ਹੈ, ਉਹਨਾਂ ਹੀ ਲਿਖ ਸਕਿਆ ਉਮੀਦ ਹੈ ਪਾਠਕ ਇਸ ਕਿਤਾਬ ਦੀਆਂ ਊਣਤੀਆਂ ਨਾ ਦੇਖਦੇ ਹੋਏ ਮਧਪ ਵਾਲੀ ਗੁਰਮਤ ਦੀ ਸੇਧ ਲੈ ਕੇ ਅਸੀਸ ਦੇਣ ਦੀ ਕਿਰਪਾਲਤਾ ਕਰਨਗੇ। ਅਤੇ ਅੱਗੇ ਤੋਂ ਸੁਚਾਰੂ ਰੂਪ ਵਿੱਚ ਸੇਵਾ ਕਰਨ ਲਈ ਉਤਸ਼ਾਹ ਬਖਸ਼ਣਗੇ ਦਾਸ ਕंवर ਅਜੀਤ ਸਿੰਘ